ਗੋਪੀ बाजकानसों सैया नींद ਮੀਤ रस री सबे हम प्रीत पई सुनबे बतिया की और पई तु देखन की तुम प्रीत पई हमरी छतिया की रीज लगी काने मुख ते हस सुंदर बात ही थी गतिया की नेह लग्यो हर सो भई मोचन होत ती गत है सो तिया की इथ श्री दशम स्कंद विचित्र आथ बिपन ग्रह को पठै वो वोंदहुरा कह क्रीडा ए सो कृष्ण कै जमुना स्नान बोर बन को गए गौ सोत्रन चरान दोरा कृष्ण सराहत तरन को बन मैं आगे गए संग ग्वाल जेते ते ते सब भूप पै सैया ਪੱਤਰ ਪਲੇ ਤਨ ਕੇ ਸੁ ਫੂਲ ਭਲੇ ਫਲ ਹੈ ਸੁ ਸੁ ਸੋਹਾਈ ਭੂਖ ਲਗੇ ਘਰ ਕੋ ਉਮਗੇ ਪੈ ਬਿਰਾਜ ਦਿਨ ਕੋ ਸੁਖ ਦਾ ਪਰਛਾਈ ਕਾਂਤ ਰਹਿ ਤਿਹ ਕੇ ਮੁਰਲੀ ਗਹਿ ਕੈ ਕਰਮੋ ਮੁਖ ਸਾਥ বাজਾਈ ਠਾੜ ਰਿਓ ਉਸ ਨੂੰ ਪਉਣ ਕਰੀ ਇੱਕ ਖਖਤ ਰਹੀ ਜਮਨਾ ਉਰਜਾਈ ਮਾਲ ਸ੍ਰੀ ਜਰ ਦੈ ਥਰੀ ਸੁਭ ਸਾਰੰਗ ਬਾਜਤ ਹੈ ਅਰ ਗਉਰੀ ਸੋਰਠਿ ਸੁਧ ਮਲਾਰ ਬਲਾਵਲ ਮੀਠੀ ਹੈ ਅੰਮ੍ਰਿਤ ਦੇ ਨਹ ਕਾਂ ਮਜਾਵਤ ਖੈ ਮੁਰਲੀ ਸੁਨਹੋਤ ਸੁਰੀ ਅਸੁਰੀ ਸਭ ਬਉਰੀ ਆਏ ਗਈ ਬ੍ਰਿਖਪਾਨ ਸੁਤਾ ਸੁਨ ਪੈ ਤਰਨੀ ਹਰਨੀ ਜਿਮ ਦੌਰੀ ਜੋਰ ਪ੍ਰਣਾਮ ਕਰਿਓ ਹਰ ਕੋ ਕਰਨਾਥ ਸੁਨੋ ਹਮ ਭੂਖ ਲਗੀ ਹੈ ਦੂਰ ਰਹੇ ਸਭ ਗੋਪਨ ਕਰ ਖੇਲਨ ਕੀ ਸੁਧ ਭਗੀ ਹੈ ਢੋਲ ਤਸੰਗ ਲਗਾ ਤੁਮਰੇ ਹਮ ਕਾਂਤ ਵੈ ਸੁਨ ਬਾਤ ਪਗੀ ਹੈ ਜਾਹੋ ਕਹੋ ਮਥੁਰਾ ਗਰੇ ਬਿਪਨ ਸਤ ਕਹੋ ਨਹ ਬਾਤ ਠਗੀ ਹੈ ਕਾਂ ਨਵਾਸ ਵੈਯਾ फिर कही हर जी सब गोपन कंसपुरी ए है ए जइय जग को मंडल विपण को ग्रह पूछत पूछत ढूंढ सो लइया अंजल जोर सवै पर पायन तौ फिर कह बिनती एह कहइया खान के कारण पूजित मांगत कान छदातर है सो सुनइया मान लई जो कान कही पर पायन आशीष नवाए चल कैपुर कंस बिखय जो गए गृह बिपण के सबगो भले कर कोट प्रणाम करी बिनती फन भोजन मांगत कान खले अब देखो चातुरता जिन की धर बालक मूर्त बिप छले बिप्रवाज सोईया को परे दिज बोल उठे हम ते तुम भोजन मांगन आए कान बडो 60 औ मुसली हमहु तुमहु 60 से ਪੇਟ ਪਰੈ ਅਪਨੋ ਤਬ ਹੀ ਜਬ ਆਨ ਤੰਦੁਲ ਮੰਗ ਪਰਾਏ ਏਤੇ ਬੈਖਾਨ ਕੋ ਮੰਗਤ ਹੈ ਇਹ ਯੋ ਕਹਿ ਕਹਿ ਬਿਪਨ ਭੋਜਨ ਜੋ ਉਹਨਾਂ ਤਬ ਹੀ ਗ੍ਰਹਿ ਗੋਪ ਚਲੇ ਸੋ ਕਿਸਾਨੇ ਕੰਸ ਬੁਰੀ ਤਜ ਗਏ ਗ੍ਰਹਿ ਬਿਪਨ 나ਥ ਛਲੇ ਜਮਨਾ ਨਿਜ ਬੋਲ ਉਠਿਓ ਮੁਸਲੀਂ ਕ੍ਰਿਸ਼ਨ ਸੰਗ ਅੰਨਿਆ ਬਿਨਾ ਜਬ ਆਪਤ ਜਾਣੇ ਦੇਖੋ ਲੈਨ ਕੋ ਆਪਤ ਥੇ ਦਿਜ ਕੀ 베ਰ ਕੋ ਦੂਰ ਪੁਰਾਨੇ ਕਬਿਤ ਬੜੇ ਹੈ ਹਕਮਤੀਓ ਕੁਜਤੀ ਕੂਰ ਕਾਇਰ ਹੈ ਬੜੇ ਹੈ ਕਮੂਤਿਓ ਕੁਜਾਤ ਬੜੇ ਜਗ ਮੈਂ ਬੜੇ ਚੋਰ ਚੂ ਹਰੇਚ ਲੀਏ ਤਦੈ ਪ੍ਰਾਣ ਕਰਾਇਆ ਤਜਾਰੀ ਬਟ ਪਾਰੀ ਔਰ ਮਗ ਮੈਂ ਬੈਠੇ ਹੈ ਅਜਾਨ ਮਾਨੋ ਕਈ ਹੈ ਸਿਆਣੇ ਕਛੂ ਜਾਣੇ ਨਾ ਗਿਆਨ ਸੋ ਕੁਰੰਗ ਬਾਦੇ ਪਗ ਮੈਂ ਬੜੇ ਹੈ ਕੁਸ਼ੈਲ ਪੈ ਕਹਾਵਤ ਹੈ ਛੈਰ ਐਸੇ ਫਿਰਤ ਨਗਰ ਜੈ ਸੋ ਫਿਰੈ ਢੋਰ ਬਗ ਮੈਂ ਮੁਸਲੀ ਬਾਜ ਕਾਨ ਸੋ ਸੁਈਆ ਆਇ ਸੋਏ ਤੋ ਖੈ ਚਲਾ ਸੰਗ ਮੂਸਲ ਸੋ ਮਥਰਾ ਸਭ ਫਾਟੋ ਵਿਪਨ ਜੈ ਕਹੋ ਪਗਰੋ ਕਹੋ ਮਾਰ ਰੋ ਕਹੋ ਰੰਚਿ ਗਿਡਾਟੋ ਔਰ ਕਹੋ ਤੋ ਖਾਰਪੁਰੀ ਬਾਲਕੈ ਅਪਨੋ ਜਮਨਾ ਮੈਂ ਸਾਟੋ ਸੰਕਤ ਹੋ ਤੂੰ ਤੇਜ ਜੁਰਾਏ ਨਾ ਹੋ ਇਕਲੋ ਆਰਿਕੋ ਸਿਰ ਕਾਟੋ ਕਾਨ ਬਾਤ ਸੁਈਆ ਕਰੋਛ ਮਾਪਨ ਮੁਸਲੀ ਹਰ ਫੇਰ ਕਹੀ ਸੰਗ ਬਾਲਕ ਬਾਨੀ ਵਿਪ ਗੁਰੂ ਸਭ ਹੀ ਜਗ ਕੇ ਸਮਝਾਏ ਕਹੀ ਏ ਕਾਨ ਕਹਾਣੀ ਆਇ ਸਮਾਨ ਗਏ ਫਿਰ ਕਹਿ ਜੋ ਹੁਤੀ ਨਿਰਪਕੰਸ ਹੈ ਕੀ ਰਈ ਧਾਨੀ ਖੈਵੇ ਕੋ ਕੋ ਜਨ ਮੰਗਿਤ ਕਾਨ ਕਹਿੋ ਨਹ ਅਭਿਮਾਨੀ ਕਬਿਤ ਕਾਨ ਜੂਕੇ ਗਵਾਰ ਨੂੰ ਕੋ ਵਿਪਨ ਦੁਬਾਰ ਵੇ ਸੁ ਉਤਰ ਦਇਓ ਨਾ ਕਛੂ ਖੈਵੇ ਕੋ ਕਛੂ ਦਇਓ ਹੀ ਰਸਾਏ ਕੋਪ ਆਏ ਹਰ ਜੂਕੇ ਪਾਸ ਕਹ ਕਰ ਪ੍ਰਣਾਮ ਐਸੋ ਉਤਰ ਦਿਨੈ ਦਇਓ ਮੂਨ ਸਾਥ ਬੈਠ ਰਹਿ ਖੈਵੇ ਕੋ ਨਾ ਦੇਸ ਜਬੈ ਫੇਰ ਆਏ ਜਵੈ ਕ੍ਰੋਧ ਮਨ ਮੈਂ ਭੈਓ ਅਤ ਹੀ ਛੁਧ ਹੱਤਰ ਪਏ ਹਾਂ ਮਦੀਨਾ ਨਾਦ ਕੀ ਦੀਏ ਪਾਵਨਾ ਤੋ ਬਲ ਤਨ ਕੋ ਗਇਓ ਸੋਇਆ ਗਰੜਾ ਤੁਝ ਦੇਖ ਤਿਨੈ ਛੁਧਵਾਨ ਕਹੋ ਮਿਲ ਕਾਮ ਕਰੋ ਰੇ ਜਾਹੋ ਕਹੋ ਓਨ ਪਤਨੀ ਪਹਿ ਵਿਪ ਬੜੇ ਮਤ ਕੇ ਅਤਿ ਬਉਰੇ ਜਗ ਕਰੈ ਜੇ ਕਾਰਨ ਕੋ ਅਰਹੂ ਕਰੈ ਜਪ ਓ ਸਤ ਸੋਰੇ ਤਾਈ ਕੋ ਬੇਦਨਾ ਜਾਣਤ ਮੂੜ ਕਹੈ ਮਿਸਟਾਨ ਕੇ ਖਾਨ ਕੋ ਕਉਰੇ ਸੋਇਆ ਸਭ ਗੋਪ ਨਿਵਾਇ ਕੈ ਸੀ ਚਲੇ ਚਲ ਕੇ ਫਿਰ ਵਿਪਨ ਕੇ ਘਰ ਆਏ ਜਾਇ ਤਵੈ ਤਨ ਕੀ ਪਤਨੀ ਪਹਿ ਕਾਣ ਤਵੈ ਸੁਧਵਾਨ ਜਿਤਾਏ ਤਉ ਸੁਨ ਸਵੈ ਪਤਨੀ ਦਜ ਠਾੜ ਪਈ ਉਠਿਆ ਆਨੰਦ ਪਾਏ ਧਾਇ ਚਲੀ ਹਰ ਕੇ ਮਿਲਬੇ ਕਹੋ ਆਨੰਦ ਕੈ ਦੁਖ ਦੂਰ ਨਸਾਏ ਬਿਪਨਗੀ ਪਰ ਜੀ ਨਾ ਰਹੀ ਤੀ ਖਾਨਰ ਕੇ ਮਿਲ ਬੇ ਏਕ ਪਰੀ ਉਠ ਮਾਰਗ ਮੈਂ ਇਕ ਦੇਹ ਰਹੀ ਜੀਏ ਦੇਹ ਪੁਜਾਈ ਤਾ ਛਭ ਕੀ ਆਤੀ ਉਪਮਾ ਕਵਨ ਮੁਖਤੇ ਇਮ ਭਾਗ ਸੁਨਾਈ ਜੋਰ ਸਿਓ ਜੋ ਬਾਤੀ ਸਰਤਾ ਨਾ ਰਹੇ ਹਟ ਕੀ ਪੋਸ ਪੀਤ ਤਾਏ ਸਵੇ ਹਰ ਕੇ ਮਿਲ ਕਹੋ ਬਿਪਨ ਕੀ ਪਤਨੀ ਬੜ ਭਾਗਨ चंद्रमुखी से दीर्घनी कवि श्याम चली हर के पग लागन है सुबंग सबै जिनके ना सकै जिनकी ब्रह्मा गणता गण ते सब इओ निकरी जे मंत्र पढ़ै निकराय बहुनागन दोहरा हर को आनन देख कै भई सबन को चैन निकट क्रिया को पाए कै पर चैन परमैन सुइया ਕਉ ਮਲ ਕੰਜ ਸੇ ਫੂਲ ਰਹਿ ਦ੍ਰਿਗ ਮੋਰ ਕੋ ਪੰਖ ਸਿਰ ਉਪਰ ਸੋਹ ਹੈ ਹੈ ਬਰਨੀ ਤਨ ਆਨਨ ਪੈ ਸਸਿ ਕੋਟਿਕ ਕੋ ਹੈ ਮਿੱਤਰ ਕੀ ਬਾਤ ਕਹਾ ਕਈਏ ਜਿਹ ਕੋ ਬਿਖ ਕਹਿ ਰਿਪ ਕੋ ਮਨ ਮੋਹ ਹੈ ਮਾਨੋ ਲੈ ਸਿਵ ਕੇ ਰਿਪ ਆਪ ਦਇਓ ਬਿਦਨਾ ਰਸ ਜਾਏ ਨਚੋ ਹੈ ਗਵਾਰ ਕੇ ਹਾਥ ਪੈ ਹਾਥ ਰਹਿ ਹਰੀ ਸ਼ਿਆਮ ਕਹ ਤਰ ਕੇ ਤਰ ਠਾਢੇ पाड को पाड तरै पियरो उर देख जसै अति आनद बाड़े ता छवि अति उपमा कव जो चुनली तिसको चुनका चुन काढ़े मानव पावस की रुत रतमै चपला चमकी कन सामन गाढ़े सैया ਲੋਚਨ का निहार प्रिया जदे रूप कै मान महामतवी होए गई तन में गृह की सुद जौ उड़गी जिमि पौन सों रुई श्याम कहे तिनको बिरहागण यौ परकी जिमि तेल सों धूई जो टुकरा पिख चुमक ढोरत बीच मनहु जल लोह की सुई सो या ਕਾਨ ਕੋ ਰੂਪ ਨਿਹਾਰ ਤ੍ਰਿਆਦ ਜਿ ਪ੍ਰੇਮ ਵਧੋ ਦੁਖ ਦੂਰ ਭੈ ਹੈ ਪੀਖ ਮਾਤ ਕੋ ਜਿਉ ਪਰਸੇ ਛਿਨ ਮੈਂ ਸਭ ਪਾਪ ਬਿਲਾਏ ਗਏ ਹੈ ਆਨਣ ਦੇ ਕਹਿ ਸ਼ਾਮ ਕਨੋ ਬਸਿਓ ਦ੍ਰਿਗ ਮੂਦ ਲੈ ਹੈ ਜਿਉ ਤਨ ਮਨੋ ਤਨ ਕੋ ਧਾਰੇ ਅੰਦਰ ਧਾਮ ਕੀ ਦਏ ਹੈ ਸਿਆ ਸੁਧ ਭਈ ਜਬ ਹੀ ਤਨ ਮੈਂ ਤਬ ਕਾਨ ਕਈ ਹਸ ਕੇ ਗ੍ਰਹਿਂ ਜਾਵੋ ਵਿਪਨ ਬੀਜ ਕਹਿ ਰਈਓ ਦਿਨ ਰਹਿਣ ਸਬੈ ਹਮਰੇ ਗੁਣ ਗਾਵੋ ਹੋਏ ਨਾ ਤਰਾਸ ਤੂੰ ਮੈਂ ਜਮ ਕੀ ਹਿਤ ਕਹਿ ਹਮ ਸੋ ਜਬ ਧਿਆਨ ਲਗਾਵੋ ਜੋ ਤੂੰ ਬਾਤ ਕਰੋ ਇਹ ਤਬ ਹੀ ਸਭ ਹੀ ਮੁਕਤਾ ਫਲ ਪਾਵੋ ਦਿਜਨ ਪਤਨੀ ਇਹ ਬਾਤ ਕਹੀ ਹਮ ਸੰਗ ਨਾ ਛਾੜ ਤਕਾਨ ਤੁਮਾਰੋ ਸੰਗ ਫਿਰੈ ਤੂੰ ਰੇ ਦਿਨ ਰਹਿਣ ਚਲੇ ਬ੍ਰਿਜ ਕੋ ਬ੍ਰਿਜ ਜੋ ਸਿਧਾਰੋ ਲਾਗ ਰਿਹਾ ਤੂੰ ਸੋ ਹਮਰੋ ਮਨ ਜਾਤ ਨਹੀਂ ਮਨ ਤਾਮ ਹਮਾਰੋ पूर्ण जोग को पाए जुगीसर आंत ना धन भी संभारो कान बाज सोइया श्री भगवान तनै पिघ प्रेम कहो मुखते तुम धाम सिधारो जाय सब पति आपने आपन कौन आपन कथा कहता है उद्धारो पुत्रन पौत्रन पत्तिन सोए कहै चर्चा सब ही दुबटारो गंध मलया घर श्याम को नाम ले रोखन को कर चंदन डारो ਮਹਾਂ ਲਈ ਪਤਨੀ ਦੇ ਜੀ ਸਮ ਅੰਮ੍ਰਿਤ ਕਾਂਰ ਕਹੀ ਬਤਿਆ ਜਿਤਨੋ ਹਰਿਆ ਉਪਦੇਸ਼ ਕਰਿਓ ਤਿਤਨੋ ਨਾ ਹੋਤ ਕਛੂ ਜਤਿਆ ਚਰਚਾ ਜਬ ਜਾ ਉਨਸੋ ਏਨ ਕੀ ਤਬ ਹੀ ਉਨ ਕੀ ਭਈ ਜਾਗਤਿਆ ਇਨ ਸਿਆਹਾ ਭਏ ਮੁਖ ਜੋ ਜੂਤੀ ਮੁਖ ਲਾਲ ਭਏ ਵਾਹ ਜੋ ਰਤਿਆ ਚਰਚਾ ਸੁਨ ਬਿਪਜੋ ਤ੍ਰੀਨਸੋ ਮਿਲ ਕੈ ਸਭ ਹੀ ਪਛਤਾਮਨ ਲਾਗੇ ਬੇਦਨ ਕੋ ਹਮ ਕੋ ਸਭ ਕੋ ਮੰਗ ਕੈ ਹਮ ਆਗੇ ਮਾਨ ਸਮੁੰਦਰ ਮੈਂ ਬੂਡੇ ਹੁਤੇ ਹਮ ਚੂਕ ਗਇਓ ਅਵਸਰ ਤੋ ਹਮ ਜਾਗੇ ਪੈ जिनकी ए है पत्नी ते ते पुन है हम बड पागे मान सवैते जे आपन को त्रिग फेर करी मिल कान बडाई लोकन के सब के पद कान हमै कह बेदन बात सुनाई तौ ना गए उन के हम पास डरे जो मरे हम कह हमरई सत लख्यो तुमको भगवान कहि हम सत कहि ना बनाई ਕਬਿਤ ਪੂਤਨਾ ਸੰਗਾਰੀ ਤ੍ਰਿਣਾ ਵਰਤ ਕੀ ਵਿਦਾਰੀ ਦੇਹ ਦੇਤ ਅਘਾਸ ਰਹੂਂ ਕੀ ਸ੍ਰੀ ਜਾਹ ਫਾਰੀਐ ਸਿਲਾ ਜਾਹੇ ਤਾਰੀ ਬਕ ਹੂਂ ਕੀ ਚੋਂਚ ជីਰ ਡਾਰੀ ਐਸੇ ਭੂਮ ਪਾਰੀ ਜੈਸੇ ਆਰੀ ਟੀਰ ਡਾਰੀ ਹੈ ਰਾਮ ਵੈ ਕਹਿ ਦੇਤਨ ਕੀ ਸੈਨਾ ਜਿਨ ਮਾਰੀ ਯਾਰੇ ਆਪ ਨੂੰ ਬਭੀਸ਼ਣ ਕੋ ਦੀਨੀ ਸਾਰੀ ਹੈ ਐਸੀ ਭਾਂਦ ਦੇ ਉਧਾਰੀ ਅਵਤਾਰ ਲੈ ਕਹਿ ਸਾਧ ਜੈਸੇ ਪ੍ਰਿਥਵੀ ਉਧਾਰੀ ਹੈ ਸੁਇਆ ਬਿਪਨ ਕੀ ਤਰੇ ਸੁਨ ਕਹਿ ਕਬੀਰ ਆਖੋ ਦਜਿ ਔਰ ਕਹੀਜੈ ਕਾਹਨ ਕਥਾ ਤਿਰੋਚਨ ਜੀ ਵਿਚਾਰ ਕਹੋ ਜੇ ਤੇ ਭੁਨ ਦੀਜੈ ਤਉ ਹਸ ਬਾਤ ਕਹੀ ਮੁਸਕਾਏ ਪਹਿਲੇ ਨਿਵਤਾਏ ਪ੍ਰਣਾਮ ਜੋ ਕੀਜੈ ਤਉ ਭਗਵਾਨ ਕਥਾ ਆਤਿਰੋਚਨ ਦੈ ਚਿਤ ਪੈ ਹੰਸੇ ਸੁਨ ਦੀਜੈ ਸੁਇਆ सालन यो अखनी बिरयाज जता हरि और पुलाव कने नुगदी अर सेव की आ लडवार सूत भले जो बने फुन खीर दही अर दूध के साथ बरे बहु और ना जात गने ए खाए चलेओ भगवान गृह कहो श्याम क बीसर पाप अने सो या गावत गीत चले गृह को गरुडा त्वाजी म आनंद पै क शोभ द श्याम के संग अली कन श्याम से चलयो उन स कै कान तब हस कै मुरली सोब जाय उठो अपने कर ले कै ठाढ़ पई जमुना सुन कै तुन पौण रहो सुन कै उर जाय कै सया राम कली जर सोरठ सारन माल श्री जर बाजत गौरी जय श्री जर गौड़ मलार बिलावल राग बसै सुठोरी मानस की का है गिनती ਸੋ ਸੁਣ ਕਹਿ ਤੁਮ ਸ੍ਰੋਣਨੁ ਮੈਂ ਤਰਨੀ ਘਰਨੀ ਜਿਵੇਂ ਆਪਤ ਦਉਰੀ ਕਬਿਤ ਬਾਜਤ ਬਸੰਤ ਅਰ ਪੈਰ ਵੇਂਢੂਲ ਰਾਗ ਬਾਜਤ ਐ ਲਲਤਾ ਕੇ ਸਾਥ ਵੈਤਨਾਸਰੀ ਮਾਲਵਾ ਕਲਿਆਣ ਅਰ ਮਾਲ ਕਉ ਸਮਾਰੂ ਰਾਗ ਬਨ ਮੈਂ ਬਜਾਵੈ ਕਾਨ ਮੰਗਲ ਨਿਵਾਸਰੀ ਸੂਰੀ ਅਰ ਆਸਰੀ ਓ ਪੰਨਗੀ ਦੇ ਹੁਤੀ ਤਾ ਤੁਨ ਕੇ ਸੰਤ ਪੈ ਨਾ ਰਹੀ ਸੁਧ ਜਾਸਰੀ ਕਹੈਉ ਦਾ ਸ੍ਰੀ ਸੋ ਐਸੀ ਬਾਸਰੀ ਬਾਸਰੀ ਸੋ ਮੇਰੇ ਜਾਨੇ ਜਾ ਮੈਂ ਸਭ ਰਾਗ ਕੋ ਨਿਵਾਸ ਸ੍ਰੀ ਕਬਿਤ ਕਰੁ ਨਾ ਨਿਧਾਨ ਵੇਦ ਕਾਹਤ ਵਖਾਨ ਯਾਕੀ ਬੀਚ ਤੀਨ ਲੋਕ ਫੈਲ ਰਹੀ ਹੈ ਸੋ ਬਾਸਰੀ ਦੇਵਨ ਕੀ ਕੰਨਿਆ ਤਾ ਕੀ ਸੁਣ ਤੁਣ ਸਰਉਨਨ ਮੈਂ ਧਾਈ ਤਾਈ ਆਵੈ ਤਜ ਕੈ ਸੁਰਗ ਬਾਸਰੀ ਵੈ ਕਰ ਪ੍ਰਸੰਨੈ ਰੂਪ ਰਾਗੋ ਨਿਹਾਰ ਕਹਿਓ ਰਚਿਓ ਹੈ ਵਿਦਾਤਾ ਰਾਗਨ ਕੋ रिजे सब गान उड गान पे मगन जब भन उपवन में बजाई कान बांसुरी सैया कान बजावत है मुरली अति आनक कै मन डिरने आए ताल बजावत कूद दिआवत गोप सब मिल मंगल गाए आपन है तनठी भगवान तिनो पहेते बहो नाच नचाए रेन परी तब आपन आपन सोए रहे गृह आनंद पाए एत श्री दशम स्कंद विचित्रनाट ग्रंथे कृष्ण अवतारे बिपण की त्रियन को चित्त हारे भोजन ले उद्धार करबो वर्णनं